गोपन बाच आपसमै सैया याई के संग सुनो मिलकै हम कुंज गलीन में खेल मचायो गावत भयो सो और तहा हम मिलकै तह मंगल गायो सो बृज त्याग गयो मथुरा इन ग्वारन ते मनुआउ आउचटायो यूं कह ऊधव सो तिन टेर हा हा हमरे गृह श्याम ना आयो गोपन बाच ऊधव सो ਇਕ ਸਮੈ ਹਮ ਕੋ ਸੁਨੂਦਵ ਕੁੰਜਨ ਮੈ ਫਿਰੈ ਸੰਗ ਲਿਏ ਹਰ ਜੂ ਆਤਿ ਹੀ ਹਿਤ ਸਾਥ ਕਨੇ ਹਮ ਪੈ ਆਤਿ ਹੀ ਕਹਿਓ ਪ੍ਰੇਮ ਕੀਏ ਸੁਖ ਭਇਓ ਬ੍ਰਿਜਨਾਰ ਹੀਏ ਸੋ ਤਜ ਕਹਿ ਮਥਰਾ ਕੋ ਗਇਓ ਤਿਹ ਕੇ ਵਿਛਰੇ ਫਲ ਕਾਉਨ ਜੀਏ ਕਬਿਓ ਬਾਸ ਪੈ ਜਿਤਨੀ ਹਨੂਦਵ ਸਿਆਮ ਕਹਿ ਹਰਿ ਬਾਤ ਬਖਾਨੀ ਗਿਆਨ ਕੋ ਉਤਰ ਦੇਤ ਬਈ ਨਹ ਪ੍ਰੇਮ ਚਿਤਾਰ ਸਭੈ ਉਚਰਾਨੀ ਜਾਹੀ ਕੇ ਦੇਖਤ ਭੋਜਨ ਖਾਤ ਸਖੀ ਜਿਹਕੇ ਬਿਨ ਪੀਤ ਨਾ ਪਾਨੀ ਗਿਆਨ ਕੀ ਜੋ ਏਨ ਬਾਤ ਕਹੀ ਤਿਨਹੂ ਹਿਤ ਸੋ ਕਰੀਏਕ ਨਾ ਮਾਨੀ ਗੋਪਨ ਬਾਚ ਉਦਵ ਸੋਮ ਸਵਈਆ ਮਿਲ ਕੈ ਤਿਨ ਉਦਵ ਸੰਗ ਕਹਿਓ ਹਰ ਸੋ ਸੁਨ ਉਦਵ ਜਾਓ ਕਹੀਓ ਕਹਿ ਕੈ ਕਰ ਉਦਵ ਗਿਆਨ ਜਿਤੋ ਪਠਿਓ ਤੇ ਤਨੂ ਸਭ ਹੀ ਗਹੀਓ ਸਭ ਹੀ ਇਨ ਗਵਾਰਨ ਪੈ ਕਵ ਸਿਆਮ ਕਹਿਓ ਹਿਤਿਆ ਖਨ ਸੋਚਿਓ ਇਨ ਕੋ ਤਿਆਗ ਗਏ ਮਥੁਰਾ ਹਮਰੀ ਸੁਦਲੇਤ ਸਦਾ ਰਈਓ ਜਬ ਗੂਦਵ ਸੋਏ ਪੌਂਤ ਕਹਿਓ ਤਬ ਕੋ ਮਨ ਪ੍ਰੀਮ ਭਰਿਓ ਹੈ ਔਰ ਗਈ ਸੁਦਪੂਰ ਸਬੈ ਮਨ ਤੇ ਸਭ ਗਿਆਨ ਹੋਤੋ ਸੋ ਤਰਿਓ ਹੈ ਸੋ ਮਿਲ ਕੈ ਸੰਗ ਗਵਾਰਨ ਕੇ ਅਤ ਕੀ ਬਾਤ ਕੇ ਸੰਗ ਢਰਿਓ ਹੈ ਗਿਆਨ ਕੇ ਧਾਰ ਮਨੋ ਕਪਰੇ ਹਿਤ ਕੀ ਸਰਤਾ ਮਹਕੂਦ ਪਰਿਉ ਹੈ ਯੋਗ ਹੈ ਸੰਗ ਗੁਵਾਰਨ ਕੇ ਜਬ ਹੀ ਸਭ ਗੁਵਾਰਨ ਕੋ ਹਿਤ ਚੀਨੋ ਊਦ ਵਿਗਿਆਨ ਦਯੋ ਤਜ ਕੈ ਮਨ ਮੈਂ ਜਬ ਪ੍ਰੇਮ ਕੋ ਸੰਗ੍ਰਹਿ ਕੀਨੋ ਹੋਏ ਗਯੋ ਤਨ ਮੈਂ ਹਿਤ ਸੋਏ ਭਾਂਤ ਕਹਿਯੋ ਸੋਕਰਿਓ ਬ੍ਰਿਜਹੀਨੋ ਤਿਆਗ ਗਏ ਤੁਮ ਕੋ ਮਥੁਰਾ ਤਹਿਤੇ ਹਰੀ ਕਾਮ ਸਖੀ ਘਟ ਕੀਨੋ ਊਦ ਬਾਦ ਗੋਪਨ ਸੋ ਸੁਇਆ ਜਾਇ ਕਹਿ ਹੋ ਮਥਰਾ ਮੈਂ ਹਵੀ ਹਰ ਕੇ ਤੁਮ ਲਿਆ ਬੇ ਹੋ ਬੀ ਜੋ ਤੁਮ ਪੈ ਬਿਰਥਾ ਸਭ ਹੀ ਜਦ ਰਾਏ ਕੇ ਪਾਸ ਕਹੈ ਹੋ ਕਹਿ ਤੁਮਰੀ ਬਿੰਤੀ ਉਹ ਪੈ ਵਿਜਾਰਜ ਹੈ ਵਿਦਤਾਰਿ ਜਵੈ ਹੋ ਪਾਇਨ ਪੈ ਕਵ ਸ਼ਾਮ ਕਹੈ ਹਰ ਕੋ ਬ੍ਰਿਜ ਭੀਤਰ ਫੇਰ ਲਿਆਏ ਹੋ ਸਵਿਆ ਇਉ ਜਬ ਉਦਵ ਬਾਤ ਕਹੀ ਉਠ ਪਾਇਨ ਲਾਗਤ ਪੀ ਤਬ ਸੋ ਦੂਹ ਘਟਿਓ ਤਿਨ ਕੇ ਮਨ ਤੇ ਅਤ ਹੀ ਮਨ ਭੀਤਰ ਆਨੰਦ ਹੋ ਕੈ ਬਿੰਤੀ ਸੰਗ ਬੂਧਵ ਕੇ ਕਵ ਸ਼ਾਮ ਕਹ ਬਿਦ ਜਾ ਉਚਰੋ ਸ਼ਾਮ ਸੋ ਜਾਇ ਕੇ ਯੋਗ ਹੀ ਯੋ ਕਰ ਕਹਿ ਕਹੋ ਪ੍ਰੀਤ ਨ ਤਿਆਗਤ ਕੋ ਕੁੰਜ ਗਲੀਨ ਮੈਂ ਖੇਲਤ ਹੀ ਸਭ ਹੀ ਮਨ ਗੁਵਾਰਨ ਕੋ ਹਰਿਓ ਜਿਨ ਕੇ ਹਿਤ ਲੋਗਨ ਹਾਸ ਸਹਯੋ ਜਿਨ ਕੇ ਹਿਤ ਸਤਰਨ ਸੋ ਲਰਿਓ ਸੰਗ ਗੋਦਵਿਕੇ ਕਵ ਸਿਆਮ ਕਹ ਬੇਨਤੀ ਕਰ ਕੈ ਇਮ ਉਚਰਿਓ ਹਮ ਤਿਆਗ ਗਏ ਬ੍ਰਿਜ ਮੈਂ ਮਥਰਾ ਤਿਹ ਤੇ ਤੁਮ ਕਾਮ ਬੁਰੋ ਕਰਿਓ ਬ੍ਰਿਜ 바ਸਨ ਤਿਆਗ ਗਏ ਮਥਰਾਪੁਰ 바ਸਨ ਕੇ ਰਸ ਪੀ ਤਰ ਪ੍ਰੇਮ ਜੀ ਤੋ ਪਰਗਵਾਰਨਥੋ ਉਨ ਸੰਗ ਰਤੇ ਇਨ ਤੇ ਸਭ ਭਾਗਿਓ ਦਇ ਤੋਇ ਹਾਥ ਸੁਨੋ ਬਤਿਆ ਹਮ ਜੋਗ ਕੇ ਭੇਖ ਪਠਾਮਨ ਲਾਗਿਓ ਤਾ ਸੰਗ ਉਦਯੋਂ ਕਈਓ ਹਰਜੂ ਤੂੰ ਪ੍ਰੇਮ ਸਭੈ ਅਵ ਤਿਆਗਿਓ ਸੁਵਈਆ ਉਦਵ ਜੋ ਤਜ ਕੈ ਬ੍ਰਿਧ ਕੋ ਚਲ ਕੈ ਜਵਹੀ ਮथुराਪੁਰ ਦੀਐ ਪੈ ਆਪਣੇ ਚਿਤਮੈ ਹਿਤ ਕੈ ਹਮ ਊਰ ਤੇ ਸ਼ਾਮ ਕੇ ਪਾਇਨ ਪਈਐ ਕਹਿ ਅਤਹੀ ਬੇਨਤੀ ਤਿਹ ਪੈ ਫੇਰ ਕਾ ਇਹ ਭਾਂਤ ਸੋ ਉਤਰ ਦਈਐ ਪ੍ਰੀਤ ਨਿਵਾਇ ਤਉ ਕਰੀਐ ਪਰ ਯੋ ਨਹੀਂ ਕਾਉ ਸੋ ਪ੍ਰੀਤ ਕਰੀਐ ਸਵਿਆ ਊਧਵ ਮੋ ਸੁਨ ਲੈ ਬਤੀਆ ਜਦ ਵੀਰ ਕੋ ਧਿਆਨ ਬਿਰਹਾ ਤਵ ਆਏ ਕੈ ਮੋਏ ਗਰਸੈ ਤਿਹਕੇ ਗਰਸੈ ਨਾ ਜਿਉ ਮਰਹੁ ਨਾ ਕਛੂ ਸੁਧ ਮੋ ਤਨ ਮੈਂ ਰਹਿ ਤਰਨੀ ਪਰਵੈ ਬਿਸਦੀ ਝਰਹੁ ਤਿਹਤੇ ਹਮਕੋ ਬਿਰਥਾ ਕਈਐ ਕੇ ਪਾਂਥ ਸੋ ਤੀਰਜ ਹੋ ਧਰਮ ਸਵਈਆ ਦੀਨ ਵੈ ਗਵਾਰਨ ਸੋ ਕਹ ਕਬ ਸ਼ਾਮ ਜੋ ਥੀ ਅਤ ਹੀ ਅਭਿਵਾਨੀ ਕੰਚਨ ਸੇ ਤਨ ਕੰਜ ਮੁਖੀ ਜੋ ਰੂਪ ਵਿਖੈ ਰਤ ਕੀ ਫੁਨਸਾਨੀ ਜੋ ਕਹ ਬਿਆਕਲ ਹੈ ਬਤੀਆ ਕਬ ਨੇ ਤੇ ਕੀ ਉਪਮਾ ਪਹਿਚਾਨੀ ਉਦ ਬਗਵਾਰਨੀਆਂ ਸਫਰੀ ਸਭ ਨਾਮ ਲੈ ਸ਼ਾਮ ਕੋ ਜੀਵਤ ਪਾਨੀ ਸਵਈਆ आतुर ਵੈ ब्रिगपान सुता संग ऊदव केश ओ कहो इम बैना भूखन भोजन ताम जितो हम को ਜਦਵੀਰ वीर ਸੋ सुरतै ना यूं कह स्याम बियोग बिखै बस गे कब ने जस यूं उच रैना रोवत पी अति ही दुख रोजोवते मनोपाल के कंजन ਮਿਰਖ ਭਾਨ ਸੁਤਾਤ ਪ੍ਰੇਮ ਛਗੀ ਮਨ ਮੈਂ ਜਦ ਬੀਰ ਕੋ ਧਿਆਨ ਲਗਾਇ ਕੈ ਰੋਵਤ ਭੀ ਅਤ ਹੀ ਦੁਖ ਸੋ ਸੰਕਾਜਰ ਨੀਰ ਗਿਰਿਓ ਟਰ ਕੈ ਕੈ ਤਾ ਛਬ ਕੋ ਜਸ ਉਚ ਮਹਾ ਕਬ ਸਿਆਮ ਕਹਿਓ ਮੁਖਤੇ ਉਮ ਗੈ ਕੈ ਚੰਦਾ ਕੋ ਜੋ ਕਲੰਕ ਤੋ ਮਨ ਨੈਣ ਨ ਚਲਿਓ ਨਿਚਰੈ ਕੈ ਸੁਇਆ गयत हीरे जो उदव सो बचना ब्रज भाण सुताज एहां तू उचारे निहो तजो ब्रज बासन सो तेह ते कछु जानत दोख बिचारे बैठ गए रथ पीतर आप नहीं इल की सो ओर निहारे त्याग गए ब्रज को मथुरा हम जानत है घट पाग हमारे सुइया जब जय हो कहो मथुरा के बखे ਪਾਇਨ ਕੋ ਗਹਿ ਕਹਿ ਰਹੀਓ ਘਟ ਕਾ ਦਸ ਜੋ ਮੋਹ ਨਾ ਮਹਿ ਜੋ ਤਾਹੀ ਕੇ ਪਾਛੇ ਤੇ ਮੋਹ ਪਤਿਆ ਲੈ ਇਹ ਭਾਂਤੈ ਸੋ ਉਜਰੀ ਜੋ ਜਾਣ ਤ ਹੋ ਹਿਤ त्याग ਗਏ ਕਵ ਹੂੰ ਹਮਰੇ ਹਿਤ ਕੇ ਸੰਗ ਭੀਜੋ ਸੁਈਆ ਉਦੋ ਗੋਬ੍ਰਿਗ ਪਾਨ ਸੁਤਾ ਬਚਨਾ ਇਹ ਭਾਂਤ ਸੂ ਉਚਰਿਓ ਹੈ ਤਿਆਗ ਦਈ ਜਵ ਔਰ ਕਥਾ ਮਨ ਜੋ ਸੰਗ ਸ਼ਿਆਮ ਕੇ ਪ੍ਰੀਮ ਭਰਿਓ ਹੈ ਤਾ ਸੰਗ ਸੂ ਕਹੋ ਬਤਿਆ ਬਨ ਮੈਂ ਹਮਰੇ ਜੋ ਸੰਗ ਅਰਿਓ ਹੈ ਮੈਂ ਤੁਮਰੇ ਸੰਗ ਕਰਿਓ ਤੁਮ ਹਮਰੇ ਸੰਗ ਕਰਿਓ ਹੈ ਬਨ ਮੈਂ ਹਮਰੇ ਸੰਗ ਖੇਲ ਕਰੇ ਮਨ ਮੈਂ ਅਬ ਸੋ ਚਿਤਾਰੋ ਮੋਰੇ ਜੋ ਸੰਗ ਕਹੀ ਬਤਿਆ ਹਿਤ ਕੀ ਸੋਈ ਆਪਣੇ ਚਿਤ ਨਿਹਾਰੋ ਤਾਹੀ ਕੋ ਧਿਆਨ ਕਰੋ ਕੇ ਹੇਤ ਤਜਿਓ ਬ੍ਰਿਜ ਓ ਮਥੁਰਾ ਕੋ ਪਧਾਰੋ ਜਾਣਤ ਹੈ ਤੁਮਰੋ ਕਛ ਦੋਸ ਨਹੀਂ ਕਛ ਹੈ ਘਟ ਭਾਗ ਹਮਾਰੋ ਸੁਈਆ ਜੋ ਉੱਤਰ ਦੇਤ ਭਯੋ ਊਧਵ ਪ੍ਰੀਤ ਕਨੀ ਹਰ ਕੀ ਸੰਗ ਤੇਰਾ ਜਾਣਤ ਹੋ ਜਾ ਹੈ ਉਭਜੈ ਇਹ ਚਿੰਤ ਕਹਿਓ ਮਨ ਮੇਰਾ ਯੋਂ ਮਥਰਾ ਤਜ ਆਵਤ ਹੈ ਜੋ ਫਿਰੈ ਨਹਿ ਗਵਾਰਨ ਕੇ ਫੁਨ ਫੇਰੈ ਹੈ ਹਮਰੇ ਕਟ ਭਾਗ ਨਾ ਆਵਤ ਹੈ ਹਰ ਜੂ ਫਿਰ ਡੇਰੈ ਸਯਾ ਯੋ ਕਹਿ ਰੋਵਤ ਪੀ ਲਲਨਾ ਆਪਣੇ ਮਨ ਮੈਂ ਅਤ ਝੂਮ ਗਿਰੀ ਪ੍ਰਿਥਮੀ ਪਰ ਸੋ ਹਿਰਦੈ ਥੋਤ ਤਨੋਂ ਬਿਸਰਾਇਓ ਭੂਲ ਗਏ ਸੋਧ ਔਰ ਸਬੈ ਹਰ ਕੇ ਮਨ ਧਿਆਨ ਬਿਖੈ ਤਿਨ ਲਾਇਓ ਯੋਂ ਕਹਿ ਉਦਵ ਤਿਨ ਟੇਰ ਹਾ ਹਮਰੇ ਗ੍ਰਹਿ ਸ਼ਾਮ ਨਾ ਆਇਓ ਸੂਈਆ ਜਾਈ ਕੇ ਸੰਗ ਸੁਨੋ ਮਿਲ ਕੈ ਹਮ ਕੁੰਝ ਗਲੀਨ ਮੈ ਖੇਲ ਮਚਾਇਓ ਗਾਵਤ ਭਇਓ ਸੋ ਠੋਰ ਤਹ ਹਮ ਹੂ ਮਿਲ ਕੈ ਤਹ ਮੰਗਲ ਗਾਇਓ ਸੋ ਬ੍ਰਿਜ ਤਿਆਗ ਗਏ ਮਧੁਰਾਇਨ ਕੁਾਰਨ ਤੇ ਮਨੁ ਚਟਾਇਓ ਯੋਂ ਕਹਿ ਉਦਵ ਸੋ ਤਿਨ ਟੀਰ ਹਮਰੇ ਗ੍ਰਹਿ ਸ਼ਾਮ ਨਾ ਆਇਓ ਸੂਈਆ ਬ੍ਰਿਜ ਤਿਆਗ ਗਇਓ ਕੋ ਕੁਸੁ ਮਨ ਤੇ ਸਭ ਹੀ ਬ੍ਰਿਜਨਾਥ ਵਿਸਾਰੀ ਸੰਗ ਰਤੇ ਪੁਰਬਾਸਨ ਕੀ ਕਵ ਸ਼ਾਮ ਕਹਿ ਸੋ ਜਾਨ ਪਿਆਰੀ ਊਧਵ ਜੂ ਸੁਨਿਐ ਬਿਰਥਾ ਤਹਿ ਤੇ ਅਦ ਬਿਆਕੁਲ ਪੀ ਬ੍ਰਿਜਨਾਰੀ ਕੁੰਚਰੀ ਜਿਉ ਅਹਰਾਜ ਤਜੈ ਤਹਿ ਬ੍ਰਿਜਨਾਰ ਮੁਰਾਰੀ ਸੋਈਆ ਊਧਵ ਕਹਿ ਫਿਰ ਸੰਗ ਕਹਿਓ ਕਵ ਸ਼ਾਮ ਕਹਿ ਬ੍ਰਿਗ ਜਈ ਹੈ ਜਾ ਮੁਖ ਕੀ ਸਮ ਚੰਦਰ ਪ੍ਰਭਾ ਜੋਤੀ ਹੂੰ ਪਰ ਮਾਨਹ ਰੂਪ ਹੈ। ਸ਼ਾਮ ਗਇਓ ਤਜ ਕੈ ਬ੍ਰਿਜ ਕੋ ਤਹ ਤੇ ਅਤ ਬਿਆ ਕੁਲ ਚਿਤ ਭਈ ਹੈ। ਜਾ ਦਿਨ ਕੇ ਮਥੁਰਾ ਮੈਂ ਗਈ ਬਿਨ ਤਵੈ ਹਮਰੀ ਸੁਧੂ ਨ ਲਈ। ਐ ਜਾ ਦਿਨ ਕੇ ਬ੍ਰਿਜ ਤਿਆਗ ਗਏ ਬਿਨ ਤਵੈ ਕੋ ਮਾਨ ਸੁ ਹੂ ਨਾ ਪਠਾਇਓ। ਕਵ ਸ਼ਾਮ ਕਹੈ ਤਿਤਨੋ ਬਿਸਰਾਇਓ। ਆਪ ਰਤੇ ਪੁਰਬਾਸਨ ਸੋ ਇਨ ਕੋ ਦੁਖ ਦਇ ਉਨ ਕੋ ਰ ਜਿਵਾਯੋ ਤਾ ਸੰਗ ਜਾਏ ਕੈ ਜੋ ਕਹੀਓ ਹਰ ਜੀ ਤੁਮਰੇ ਕਹੋ ਕਾ ਜੀ ਆਯੋ ਤਿਆਗ ਗਏ ਮਥਰਾ ਬ੍ਰਿਜ ਕੋ ਚਲ ਕੈ ਫਿਰ ਆਪ ਨਹੀਂ ਬ੍ਰਿਜ ਆਏ ਸੰਗ ਰਤੇ ਪੁਰਬਾਸਨ ਕੇ ਕਬ ਸ਼ਾਮ ਕਹੈ ਮਨ ਆਨੰਦ ਪਾਏ ਦਇ ਗਿਓ ਹੈ ਇਨ ਕੋ ਤਖੂਦਵ ਪੈ ਮਨ ਮੈ ਨਾ ਹੁਲਾਸ ਬਿਢਾਏ ਆਪ ਨਾ ਥੇ ਬ੍ਰਿਜ ਮੈ ਉਪਜੇ ਇਨ ਸੋ ਸੋ ਭਏ ਛਿਨ ਬੀਚ ਪਰਾਏ ਸੋਈਆ ਤਿਆਗ ਗਏ ਨਾ ਲਈ ਇਨ ਕੀ ਸੁਧ ਹੋਤ ਕਛੂ ਮਨ ਮੋਹ ਤੁਹਾਰੇ ਆਪ ਰਚੇ ਪੁਰ ਸੋ ਇਨ ਕੇ ਸਭ ਪ੍ਰੇਮ ਵਿਦਾ ਕਰਿ ਤਾਤੇ ਨ ਮਾਨ ਕਰੋ ਫਿਰ ਆਵਹੁ ਜੀਤ ਤਪੇ ਤੁਮਹੁ ਹਮ ਹਾਰੇ ਤਾਤੇ ਤਜੋ ਮਥੁਰਾ ਫਿਰ ਆਵਹੁ ਏ ਸਭ ਗਉਨ ਕੈ ਰਖਵਾਰੇ ਸੋਈਆ श्याम चितार कह श्याम कहे मन में सब ग्वारनियां दुख पावे एक पराय मुरज आए धरा एक वियोग भरी गुण वियोग ही गावे को कह जदुरा मुख ते सुन श्रोन्नन बात ता इउ ठावे जो पिखवे न तहा तिनको सो कह हमको हरि हाथ न आवै सैया ग्वारन ਵਿਆ ਕੋ ਲੋ ਹੋਏ ਗਈ ਚਿਤ ਮੈ ਬ੍ਰਖ ਭਾਣ ਸੁਤਾ ਮਨ ਮੈਂ ਮੁਰਝਾਈ ਜੋ ਬਿਰਥਾ ਮਨ ਬੀਜ ਹੋਤੀ ਸੋ ਉਦਵ ਕੇ ਤਹ ਪਾਸ ਸੁਨਾਈ ਸਿਆਮ ਨਾ ਆਵਤ ਹੈ ਤੇ অতি ਦੁਖ ਭਇਓ ਪਰਨਿਓ ਨਹੀਂ ਜਾਈ ਸੁਈਆ ਉਦਵ ਉਤਰ ਦੇਤ ਪਇਓ ਅਤ ਵਿਯੋਗ ਮਨੈ ਆਪਣੇ ਸੋ ਕਹਿ ਹੈ ਗਵਰਨ ਕੇ ਮਨ ਮਦ ਬਿਖੈ ਕਵ ਸਿਆਮ ਕਹਿ ਜੋ ਬਾਤ ਰਚੈ ਹੈ ਥੋਰੇ ਹੀ ਦਿਉ ਸੁਨਵੈ ਮਿਲ ਖੈ ਜਿਹਕੇ ਉਰ ਮੈ ਨਾ ਕਛੂ ਪਰਮ ਭੈ ਹੈ ਜੋਗਨ ਹੋਏ ਜਪੋ ਹਰ ਕੋ ਮੁਖ ਮੰਗੋਗੀ ਤੁਮ ਸੋ ਵਰਦੈ ਸਈਆ ਉਨਧੈ ਜਬ ਊਦਵ ਗਿਆਨ ਚਲਿਓ ਚਲ ਕੈ ਜਸਦਾ ਪਦ ਪੈ ਸੋ ਆਇਓ ਆਪਧੀ ਜਸਦਾ ਜਸਦਾ ਆਪਦੀ ਪਹਾਇ ਨੀ ਸੀਸ ਝੁਕਾਇਓ ਸਿਆਮ ਹੀ ਸਿਆਮ ਸਦਾ ਕਹੀਓ ਕਹਿ ਕੈ ਇਹ ਮੋਹ ਪਹਿ ਕਾਨ ਪਠਾਇਓ ਯੋ ਕਹਿ ਕੈ ਰਥ ਪੈ ਚੜ ਕੇ ਰਥ ਕੋ ਮਥੁਰਾ ਹੀ ਕੀ ਓਰ ਚਲਾਇਓ ਊਧ ਬਾਜ ਕਾਨ ਜੂ ਸੋ ਸੋਈਆ ਆਏ ਤਬੈ ਮਥੁਰਾਪੁਰ ਮੈ ਬਲਰਾਮ ਔ ਸਿਆਮ ਕਹਿ ਪਾਇ ਪਰਿਓ ਕਹਿੋ ਜੋ ਤੁਮ ਮੋ ਕਹਿ ਕੈ ਪਠਿਓ ਤਿੰਸੂਏ ਭਾਂਤੀ ਸੋ ਉਚਰਿਓ ਸੰਗ ਨੰਦ ਕੇ ਓਨ ਕੇ ਚਰਚਾ ਕਰ ਗਿਆਨ ਕੀ ਫੇਰ ਫਿਰਿਓ ਤੁਮਰੋ ਮੁਖ ਭਾਨ ਨਿਹਾਰਤ ਹੀ ਤੁਮ ਸੋ ਦੁਖ ਥੋ ਸਭ ਤੁਮਰੇ ਪਗ ਭੇਟ ਗਇਓ ਜਬ ਹੀ ਤਬ ਹੀ ਫੁਨੰਨੰਦ ਕੇ ਧਾਮ ਗਇਓ ਤਿਹ ਕੋ ਕਰ ਕਹਿ ਹਰ ਗਿਆਨ ਪ੍ਰਬੋਧ ਉਠਿਓ ਚਲ ਗਵਾਰਨ ਪਾਸੈਓ ਤੁਮਰੋ ਹੁਨ ਦੁਖ ਕਹਿਓ ਹਮ ਪੈ ਸੁਨ ਉੱਤਰ ਮੈਂ ਇਹ ਭਾੰਦ ਦਇਓ ਬਲ ਸਿਆਮੈ ਸਿਆਮ ਸਦਾ ਜਪਿਓ ਸੁਨ ਨਾਮੈ ਪ੍ਰੇਮ ਕਨੋ ਵਡਿਓ ਊਧ ਸੰਦੇਸ ਬਾਜ ਸਵੈਯਾ ਗਵਾਰ ਸੰਗ ਐਸੇ ਕਹਿਓ ਹਮ ਔਰਤੇ ਸਿਆਮ ਕੇ ਪਾਇਨ ਪਈਐ ਕਹੀਓ ਪੁਰਬਾਸਨ ਕੋ ਤਜ ਕੈ ਬ੍ਰਿਜ ਬਾਸਨ ਕੋ ਸੁਖ ਦਈਐ ਜਸੁਦਾ ਇਹ ਭਾਂਤ ਕਰੀ ਬਿੰਤੀ ਬਿੰਤੀ ਕਹੀਓ ਸੰਗਪੂਤ ਕਨਈਐ ਉਦਵਤਾ ਸੰਗ ਜੋ ਕਹੀਓ ਬਉਰੋ ਫਿਰ ਆਏ ਕੈ ਮੱਖਣ ਖਈਐ ਸਵਿਆ ਹੋਰ ਕਹੀ ਬਿੰਤੀ ਤੁਮ ਪੈ ਸੁਸਨੋ ਅਰ ਔਰਨ ਡਾਰੋ ਐਸੇ ਕਹਾ ਜਸਦਾ ਤੁਮ ਕੋ ਅਤ ਹੀ ਬ੍ਰਿਜਨਾਥ ਪਿਆਰੋ ਤਾਤੇ ਕਰੋ ਨਾ ਕਛੂ ਗਨਤੀ ਹਮਰੋ ਸੋ ਕਹੋ ਤੁਮ ਪ੍ਰੇਮ ਵਿਚਾਰੋ ਤਾਹੀ ਤੇ ਬੇਖਤ ਜੋ ਮਧੁਰਾ ਉਠਕੇ ਅਬ ਹੀ ਬ੍ਰਿਜਪੂਤ ਪਧਾਰੋ ਸੁਈਆ ਮਾਤ ਘਰੀ ਬਿੰਦੀ ਤੁਮ ਪੈ ਕਬਿ ਸ਼ਾਮ ਕਹੈ ਜੋ ਹੈ ਬ੍ਰਿਜਰਾਨੀ ਤਾਹੀ ਕੋ ਪ੍ਰੇਮ ਕਨੋ ਤੁਮ ਸੋ ਹਮ ਆਪਣੇ ਜੀ ਮਹਿ ਪ੍ਰੀਤ ਪਛਾਨੀ ਤਾਂਤੇ ਕਹੋ ਤਜ ਕੈ ਮਧੁਰਾ ਬ੍ਰਿਜ ਆਵੋ ਯਾ ਬਿਦ ਬਖਾਨੀ ਇਆਰੇ ਹੋਤੇ ਤਬ ਮਾਨਤ ਥੇ अवस्यारे पए तब एक ना मानी ताई ते संग कहो तुमरे तज कै मथुरा ब्रज को अब अयय मान कै सी कहो हमरी तेहठौर नहीं पलवा ठारय यूं कह ग्वालनिया हम सो सब ही ब्रज बासन को सुख दइय सो सुध भूल गई तुमको हमरे जो अवसर पायन पइय सोइया ਤਾਹੀ ਤੇ ਤਿਆਗ ਰਿਓ ਮਥੁਰਾ ਕਬ ਸ਼ਾਮ ਕਹੈ ਬ੍ਰਿਜਮੈ ਫਿਰ ਆਵਹੁ ਗੁਵਾਰਨ ਪ੍ਰੀਤ ਪਛਾਨ ਕਹੋ ਤਿਹ ਤੇ ਤਿਹ ਨਾ ਟੀਲ ਲਗਾਵੋ ਯੋਂ ਕਹਿ ਪਾਇਨ ਪੈ ਹਮਰੇ ਹਮ ਸੰਗ ਕਹੋ ਸੋ ਤਹਾ ਤੁਮ ਜਾਵੋ ਜਾਇ ਕੈ ਆਵਹੁ ਜੋ ਕਈਓ ਹਮ ਕੋ ਸੁਖ ਹੋ ਤੁਮ ਹੂ ਸੁਖ ਪਾਵੋ ਸਵਿਆ ਤਾਂ ਤੇ ਕਹੋ ਤਜ ਕੈ ਮਥੁਰਾ ਫਿਰ ਕੈ ਬ੍ਰਿਜ ਬਾਸਨ ਕਹੋ ਸੁਖ ਦੀਜੈ ਆਵੋ ਫੇਰ ਕਹੋ ਬ੍ਰਿਜ ਮੈਂ ਇਹ ਕਾਮ ਕੀਏ ਤੁਮਰੋ ਨਹੀਂ ਛੀਜੈ ਆਏ ਕਿਰਪਾਲ ਦਿਖਾਵਹ ਰੂਪ ਕਹੋ ਜਿਹ ਦੇਖਤ ਹੀ ਮਨ ਜੈ ਕੁੰਝ ਗਲੀਨ ਮੈਂ ਫੇਰ ਕਹੋ ਹਮਰੇ ਅਧਰਾਨਨ ਕੋ ਰਸ ਲੀਜੈ ਸਵਈਆ ਸ਼ਾਮ ਕਹੋ ਸੰਗ ਹੈ ਤੁਮਰੇ ਤੁਮ ਕੋ ਬ੍ਰਿਜ ਬੀਚ ਪਿਆਰੀ ਕਾਨ ਰਤੇ ਪੁਰ ਬਾਸ ਸੰਸੋ ਕਬ ਚਿਤਾਰੀ ਪੰਥ ਨਿਹਾਰਤ ਨਨਨ ਕੀ ਕਬ ਸ਼ਾਮ ਕਹੈ ਪੁਤਰੀ ਦੋ ਹਾਰੀ ਉਦਵ ਸ਼ਾਮ ਸੋ ਜੋ ਕਈਓ ਤੁਮਰੇ ਬਿਨ ਭੀ ਸਭ ਗੁਵਾਰ ਸੋਈਆ ਔਰ ਕਹੀ ਤੂੰ ਸੋ ਹਰ ਜੂ ਭਾਨ ਸੁਤਾ ਤੂੰ ਕੋ ਦਿਨ ਤੇ ਬ੍ਰਿਧ ਤਿਆਗ ਗਏ ਦਿਨ ਤਾ ਨਹੀਂ ਖਮ ਹੂਐ ਸੰਭਾਰੀ ਆਭੋ ਤਿਆਗ ਅਬੈ ਮਥੁਰਾ ਤੁਮਰੇ ਬਿਨ ਕੀ ਅਬ ਹੋਏ ਵਿਚਾਰੀ ਮੈਂ ਤੁਸਿਓ ਹਰੀਮਾਨ ਕਰਿਓ ਤਜ ਆਵ ਹੋ ਮਾਨ ਅਬੈ ਹਮ ਹਾਰੀ ਤਿਆਗ ਗਏ ਖਮ ਕੋ ਕਿਹ ਹੇਤ ਤੇ ਬਾਤ ਕਛੂ ਤੁਮਰੀ ਨ ਬਿਗਾਰੀ ਪਾਇਨ ਮੋਹ ਪਰ ਕੈ ਸੁਨੀਐ ਪ੍ਰਭ ਏ ਬਤਿਆ ਏ ਭਾਂ ਤੂ ਚਾਰੀ ਆਪ ਰਚੇ ਪੁਰਵਾਸਨ ਸੋ ਮਨ ਤੇ ਸਭ ਹੀ ਬ੍ਰਜਨਾਰ ਵਿਸਾਰੀ ਮਾਨ ਕਰਿਓ ਤੁਮ ਸੋ ਘਟ ਕਾਮ ਕਰਿਓ ਅਬ ਸਿਆਮ ਹਮ ਹਾਰੀ ਸੋਈਆ ਔਰ ਕਰੀ ਤੁਮ ਸੋ ਬੇਨਤੀ ਸਿਆਮ ਕਹੈ ਚਿਤ ਦੈ ਸੁਨ ਲੀਜੈ ਖੇਰ ਤਥੀ ਤੁਮ ਸੋ ਵਨ ਮੈ ਤੇ ਔਸਰ ਕੀ ਕਬ ਹੂ ਸਦ ਕੀਜੈ ਗਾਵਤ ਤਥੀ ਤੁਮ ਪੈ ਮਿਲ ਕੈ ਜੇ ਕੀ ਸੁਰਤੇ ਕਛ ਤਾਨ ਨ ਚੀਜੈ ਤਾ ਕੋ ਕਹੋ ਤਹਿ ਕੀ ਸੁਧ ਕੈ ਬਹਰੋ ਬ੍ਰਿਜ ਬਾਸਨ ਕੋ ਸੁਖ ਜੈ ਸੋਇਆ ਔਰ ਕਹੀ ਬ੍ਰਿਖ ਪਾਨ ਸੁਤਾ ਹਰ ਸੋ ਬਾਤ ਅਬੈ ਸੁਨ ਲਈਐ ਿਉ ਕਹੋ त्याग ਤੁਮੈ ਮਥਰਾ ਬਹਰੋ ਬ੍ਰਿਜ ਕੁੰਜੇ ਨ ਭੀਤਰੈਐ ਜੋ ਹਮਰੇ ਸੰਗ ਖੇਲ ਤਥੇ ਤਹਿ ਭਾਂਤ ਕਹੋ ਫਿਰ ਖੇਲ ਮਚੈਐ ਚਾਹ ਕਣੀ ਤੁਇ ਕੀ ਗ੍ਰਹਿ ਆਏ ਕਹੋ ਹਮ ਕੋ ਸੁਖ ਦੀਐ ਸੋਇਆ ਤੇਰੇ ਪਿਖੇ ਬਿਨ 헤 ਹਰ ਦੀ ਕਹੀ ਭਾਂਤ ਕਹਿਓ ਨਹੀਂ ਮੋ ਮਨ ਭੀਜੈ ਸੂਕ ਭਈ ਪੁਤਰੀ ਸੀ ਕਹਿਓ ਕਹੀ ਜੋ ਹਰ ਸੋ ਬਿੰਤੀ ਸੁਨ ਲੀਜੈ ਬਾਤਨ ਮੋਹੇ ਨਾ ਹੋਤ ਪ੍ਰਤੀਤ ਕਹਿਓ ਕਨ ਸਿਆਮ ਪਿਖੇਈ ਪ੍ਰਸੀਜੈ ਆਨਨ ਪੈ ਸਮ ਚੰਦ ਨਿਹਾਰ ਚਕੋਰ ਸੀ ਗਵਾਰਨ ਕੋ ਸੁਖ ਦੀਜੈ ਭੂਦਵ ਚੰਦਰ ਭਗਾ ਕੋ ਸੰਦੇਸ਼ ਬਾਚ ਸਵਈਆ ਯੋ ਤੋ ਸੋ ਕਹੋ ਚੰਦਰਪਗਾ ਹਰ ਜੂ ਆਪਣੋ ਮੁਖ ਚੰਦ ਦਿਖਾਈਐ ਬਿਆਕਰ ਹੋਏ ਗਈ ਬਿਨ ਤਵੈ ਸੋ ਹਹਾ ਕਯੋ ਟੀਰ ਖਲੀ ਤਰ ਪਈਐ ਤਾਹੀ ਤੇ ਆਵੋ ਨਾ ਚਿਰ ਲਾਵੋ ਮੋਦੀਏ ਕੀ ਅਭੀ ਸੁਨ ਲਈਐ हे ਬ੍ਰਿਜਨਾਥ ਕਯੋ ਨੰਦ ਲਾਲ ਚਿਕੂਰਨ ਗਵਾਰਨ ਕੋ ਸੁਖ ਦਈਐ ਸੋਇਆ हे ਬ੍ਰਿਜਨਾਥ ਕਯੋ ਬ੍ਰਿਜਨਾਰ ਹਹਾ ਨੰਦ ਲਾਲ ਨਹੀਂ ਚਿਰ ਕੀਜੈ हे जय दुराय अग्रज जस दासत रक्षक तेन कहो सुन लीजै साप के नाथ असुर बधिया अर कामन गोकल नाथ न छीजै कंस विधार अवे करतार चकोरन ग्वाल कहो सुख दीजै सैया हे नंद नंद कहो सुख कंद मुकंद सुनो बतिया गिरधारी गोकल नाथ कहो बक के रिप रूप दिखाव मोहे मुरारी ਬ੍ਰਿਜਨਾਰਥ ਸੁਨੋ ਜਸਦਾ ਸੁਤ ਭੀ ਬਿਨ ਤਵੇ ਬ੍ਰਿਜਨਾਰ ਵਿਚਾਰੀ ਜਾਣਤ ਹੈ ਹਰ ਜੂ ਆਪਣੇ ਮਨ ਤੇ ਸਭ ਹੀ ਇਹ ਤ੍ਰੀਅ ਵਿਸਾਰੀ ਸੂਇਆ ਕੰਸ ਕੇ ਮਾਰ ਸੁਨੋ ਕਰਤਾਰ ਬਕਾ ਮੁਖ ਘਾਰ ਕਹੋ ਸੁਨ ਲੈ ਸਭ ਦੁਖ ਨਿਵਾਰ ਸੁਨੋ ਬ੍ਰਿਜਨਾਰਥ ਅਬੈ ਇਨ ਗਵਾਰਨ ਰੂਪ ਦਿਖੈ ਕਨ ਸ਼ਾਮ ਕੀ ਮੂਰਤ ਪੇਖੇ ਬਿਨਾ ਨਾ ਕਛੂ ਇਨ ਕੇ ਮਨ ਬੀਚ ਰੁਚੈ ਤੇਹ ਤੇ ਹਰ ਦੂ ਤਜ ਕੈ ਮਥੁਰਾ ਇਹਨ ਕੈ ਸਭ ਸੋ ਕੋ ਹਰਦਾ ਬਿਜ ਛਟਾਰ ਮੈਨ ਪ੍ਰਵਾਸ ਸੰਦੇਸ ਬਾਜ ਸੁਇ ਜਾਂ ਛਟਾਰ ਮੈਨ ਪ੍ਰਵਾਸ ਸੰਗ ਤੋਹ ਸਿਆਮ ਕਹੋ ਸੁਨ ਐਸੇ ਪ੍ਰੀਤ ਵਢਾਏ ਇਨ ਸੋ ਅਬ ਥਾਗ ਗਹਿ ਕਹੋ ਕਾਰਨ ਕੈਸੇ ਆਵੋ ਸਿਆਮ ਨਾ ਢੀਲ ਲਗਾਵੋ ਖੇਲ ਕਰੋ ਹਮ ਸੋ ਵੈਸੇ ਮਾਨ ਕਰੈ ਬ੍ਰਿਖਪਾਨ ਸੁਤਾ ਪਠਵੋ ਹਮ ਕੋ ਤੁਮ ਵਾਬਿਜੈ ਸੇ ਸੁਇਆ ਸੋ ਜੋ ਰੋ ਰਹਹਿ ਬੋ ਜਬ ਸਰਉਂ ਧਰੇਗੀ ਤਿਆਗ ਤਵੈ ਆਪਣੇ ਸੁਖ ਕੋ ਅਤ ਹੀ ਮਨ ਭੀਤਰ ਸੋਕ ਕਰੈਗੀ ਜੋਗਨ ਬਸਤਰਨ ਕੋ ਤਰਹਿ ਕੇ ਕਹਿਓ ਬਿਖ ਖਾਏ ਕੈ ਪ੍ਰਾਨ ਪਰੈਗੀ ताही ते हे हरजू तुम सो ब्रख भाण सुता फिर मान करेगी सवैया यो तो कही अनुहु तुमको ब्रख भाण सुता जो कहो सुन लीजे त्याग गए हम को ब्रज में मनुवा तुम रो सो लखो ना परसीजे बैठ रहे अब हो मथुरा ए भांत कहो मनुवा जब खीजे जो हम को तुम पीठ दई तुमको तुमरी मन भावत दीजे और कही तुम सो ब्रजनाथ कही अब उद्धव सो सुन लइया आप चलो तो नहीं कहो नाथ बुलावन ग्वारन दूत पठइया जो को दूत पठो न कहो तब तो उठ आपन ही तह जइय नातर तर को को हु को श्याम कहे अब दान देवइय ਤੇਰੋ ਹੀ ਧਿਆਨ ਧਰੈ ਹਰ ਜੂਰ ਅਰ ਤੇਰੋ ਹੀ ਲੈ ਕਰ ਨਾਮ ਪੁਕਾਰੈ ਮਾਤ ਪਿਤਾ ਕੀ ਨਾ ਲਾਜ ਕਰੈ ਹਰ ਸਾਇਤ ਸਿਆਮ ਹੀ ਸਿਆਮ ਚਿਤਾਰੈ ਨਾਮ ਅਧਾਰ ਤੇ ਜੀਵਤ ਹੈ ਬਿਨ ਨਾਮ ਕਹੋ ਛਿਨ ਮੈਂ ਕਸ਼ਟਾਰੈ ਆਯਾ ਵਿਦ ਦੇਖ ਦਸਾ ਓਨ ਕੀ ਬੜਿਓ ਜੀ ਸੋਖ ਹਮਾਰੈ ਸਵਯਾ ਮਾਤ ਪਿਤਾਨ ਕੀ ਸੰਕ ਕਰੈ ਨਹ ਸਿਆਮ ਹੀ ਸਿਆਮ ਕਰੈ ਮੁਖ ਸੋ ਉਮ ਗਿਰੈ ਜਾ ਮਤਵਾਰ ਪਰੈ ਗਿਰ ਕੈ ਧਰ ਪੈ ਸੋ ਤਿਉ ਬ੍ਰਿਧ ਕੁੰਜਨ ਢੂਂਡਤ ਹੈ ਤੁਮ ਕੋ ਕਬ ਸ਼ਾਮ ਕੈ ਧਨ ਲੋਭ ਕਿ ਜਿਉ ਅਵਤਾਤਿ ਕਰੋ ਬਿੰਤੀ ਤੁਮ ਸੋ ਪਿਖ ਕੈ ਤਿਨ ਕੋ ਹੁਨ ਹੋ ਦੁਖੀ ਹੋ ਆਪ ਚਲੋ ਇਹ ਤੇ ਨ ਪਲੀ ਜੋ ਭਾਪ ਚਲੋ ਨਹੀਂ ਦੂਤ ਪਠੀਜੈ ਤਾਂ ਤੇ ਕਰੋ ਬਿੰਤੀ ਤੁਮ ਸੋ ਦੋ ਬਾਤਨ ਤੇ ਇਕ ਬਾਤ ਕਰੀਜੈ ਜਿਉ ਜਲ ਕੇ ਬਿਨ ਮੀਨ ਦਸਾ ਸੋ ਦਸਾ ਭਈ ਗਵਾਰਨ ਕੀ ਸੁਨ ਲੀਜੈ ਕਹਿ ਜਲ ਹੋਏ ਗੁਨੈ ਮਿਲਿਐ ਕੇ ਉਹਨਾਂ ਦ੍ਰਿੜਤਾ ਕੋ ਕਹੋ ਵਰ ਦੀਜੈ ਕਬਿਓ ਬਾਚ ਸੁਈਆ ਬ੍ਰਿਧ ਬਾਸਨ ਹਾਲ ਕਿਦੋ ਹਰਜੂ ਫਨੂਦवते ਸਭ ਹੀ ਸੁਨ ਲੀਨੋ ਜਾ ਕੀ ਕਥਾ ਸੁਨ ਕੈ ਚਿਤ ਤੇ ਸੋ ਹੁਲਾਸ ਘਟੈ ਦੁਖ ਹੋਵਤ ਜੀਨੋ ਸ਼ਾਮ ਕਹਿਓ ਮੁਖਤੇ ਇਹ ਭਾਂਤ ਕਿਦੋ ਕਾਵਿਨਾਇ ਸੋ ਸੋ ਲਖ ਲੀਨੋ ਊਧੋ ਮੈਂ ਉਨਗਵਾਰਨ ਕੋ ਸੋ ਕਿਉ ਦ੍ਰਿੜਤਾ ਕੋ ਅਬੈ ਵਰਦੀਨੋ ਦੋਹਰਾ ਸਤਰਾ ਹੈ ਸੈ ਚਵਤਾਲ ਮੈਂ ਸਾਮਨ ਸੋਦ ਬੁੱਧਵਾਰ ਨਗਰ ਪਾਵਟਾ ਮੋਤਮੋ ਰਚਿਓ ਗ੍ਰੰਥ ਸੁਧਾਰੇ ਦੋਹਰਾ ਖੜਗ ਕੀ ਕਿਰਪਾ ਤੇ ਪੋਥੀ ਰਚੀ ਵਿਚਾਰ ਪੂਲ ਹੋਏ ਜਹ ਤਹ ਸੋ ਕਾਵੀ ਭੜਿਓ ਸਵੈ ਸੁਧਾਰ एत श्री दशम स्कंदे पुराणे विचित्र नाटक ग्रंथे कृष्णा अवतारे गोपी उद्धव संवादे विरहा नाटक वर्णनं नामत्याए समापतः मस्त